ਸ਼ਲੋਕ ਮਹਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀ ਤਾਰ ਲਗਨ ਗੁਰ ਤੁੱਠੇ ਸੱਜਣ ਮੇਲਿਆ ਜਨ ਨਾਨਕ ਸੁਖ ਸਵੰਨ ਸੁਣੀ ਸੱਜਣਾ ਪ੍ਰੇਮ ਸੁਦੇਸਰਾ ਇਹ ਸੱਜਣਾ ਸਾਨੂ ਨੇ ਜੁੜੀ ਹੋਈ ਤੇਰੇ ਕੰਝ ਨਾਲ ਜੁੜੀ ਹੁੰਦੀ ਹੈ ਤੇਰੇ ਬਲੇ ਸੰਗਾਵੜੀ ਬੇੜੀ ਤੇਰਾ ਆਇਆ ਜੋ ਸਾਰਵਜਿਉ ਤੇਰੇ ਤੇ ਲੱਗਿਆ ਤੂੰ ਖੜੇ ਨਾ ਸੱਜਣ ਮੇਲੇ ਫਿਰ ਸੱਜਣ ਬਿਨਾਂ ਤੂੰ ਕਿੰਨਾ ਮਾਨ ਸੁਗੀ ਸੁਆਦ ਫਿਰ ਸੁਗਦੀ ਦੀ ਦੌੜੀ ਨਹੀਂ ਤਾਂ ਅੱਖੋਂ ਦੀ ਤਾਰ ਜੁੜੀ ਹੋ ਰਹੀ ਖੁੱਲੀ ਜਾਂਦੀ ਇਹ ਜਦ ਸਾਹੂ ਸੁਧਾ ਲੋੜੀਨਾ ਲਬਲੇ ਦੀ ਤੁਨਾ ਜੜ ਵੇ ਜੀ ਦੇ ਤੁਰੀ ਦੇ ਜੀ ਹੈ ਹਾਣੀ ਮਹੱਲਾ ਚੌਥਾ ਸਤਗੁਰ ਦਾਤਾ ਦਇਾਲ ਹੈ ਜਿਸ ਨੂੰ ਦਇਆ ਸਦਾ ਹੋਏ ਸਤਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਈ ਸਤਿਗੁਰ ਦਾ ਤਾਂ ਦਿਆਲ ਹੈ ਸਤਿਗੁਰ ਦਾ ਤਾਂ ਦਿਆਲ ਹੈ ਜਿਸ ਨੂੰ ਦਇਆ ਜਨਾਵੇ ਉਹ ਤਾਂ ਸਦਾ ਹੈ ਸਦਾ ਹੀ ਦਿਆਲ ਲੱਭਾ ਜਿਹੜਾ ਨਹੀਂ ਦੇ ਤਨ ਨਾ ਕੋਈ ਸਤਿਗੁਰ ਸਭਨਾ ਦਾ ਭਲਾ ਮੰਗਾਏਂਦਾ ਬੁਰਾ ਕਿਉ ਹੋਈ ਤਨ ਵਿੱਚੋਂ ਤ੍ਰਿਸ਼ਟਿਆ ਕੋਈ ਜਿਹੜੇ ਦੇ ਨੋੜ ਸਭ ਦੇਖੇ ਪ੍ਰਭ ਇੱਕ ਹੋਏ ਉਹ ਇੱਕ ਬ੍ਰਹਮਾ ਦੇਖਦਾ ਸਾਰੇ ਇਹ ਕਿ ਲਾਣੇ ਦੇ ਦੇ ਕਿਹਾ ਵਿੱਚ ਦ੍ਰਿਸ਼ਿਆ ਨੂੰ ਕੋਈ ਉੱਪਰ ਦੇ ਵਿੱਚ ਕਿਤੇ ਨਹੀਂ ਵੀ ਤ੍ਰਿਸ਼ਣ ਗੁਰੂ ਘਰ ਤੋਂ ਹਟੋ ਕੇ ਪੈਰੋਲ ਆਪਣੇ ਆਪਣੇ ਪੈਰੋਲ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ ਵੀ ਚਾਹੇ ਉੱਥੇ ਨਹੀਂ ਚੜ ਕੇ ਸੀ ਚਾਹੇ ਰਾਜੂ ਕੋਈ ਨਹੀਂ ਪਹੁੰਚਿਆ ਨਹੀਂ ਤਾਂ ਜੇ ਤ੍ਰਿਸ਼ੀ ਜਾਂ ਦਾ ਕੁਰਬਾਨੀ ਆ ਜਾਂਦੀ ਕੁਰਬਾਨੀ ਦਾ ਜੀ ਦੋ ਜੀ ਠੀਕ ਹੈ ਜੀ ਸਤਗੁਰ ਸਬਨਾ ਦਾ ਪਰਮ ਨਾ ਇਹਦਾ ਤਿਸ ਦਾ ਬੁਰਾ ਕਿਉਂ ਦਾ ਬੁਰਾ ਕਿੰਨਾ ਸਰਦਾ ਸਤਗੁਰ ਦਾ ਸਭ ਲੇਪਰਾਤ ਦਾਰੇ ਹੂੰ ਹੂੰ ਫਿਰ ਪੜਾ ਬੁਰਾ ਦਾ ਪਰਮੇਸ਼ਰ ਦੇ ਹੱਥ ਹੈ ਪਰਮੇਸ਼ਰ ਦੀ ਬਾਣੀ ਹੈ ਪਰਮੇਸ਼ਰ ਦਾ ਹੁਕਮ ਹੈ ਪਰਮੇਸ਼ਰ ਦਾ ਬੈਠੇ ਜੈ ਸultan ਦੇ ਦੁਖੀ ਲੋਕਾਂ ਨੂੰ ਦਿੱਤਾ ਹੋਇਆ ਜੇ ਇਹ ਮੈਂ ਉਲਟਿਆ ਪਾ ਦੇ ਉਦੋਂ ਭਲਾ ਹੋ ਕੇ ਜਊਗਾ ਮੈਂ ਕਰੂ ਕੌਣ ਲੁਦਾ ਏਟੀ ਬੜੀ ਸ਼ਕਤੀ ਆਉ ਕਿ ਤੁਹ ਇਹ ਜੇ ਸਾਧਗੋ ਨੇ ਕੋਈ ਕਰਦਾ ਹੈ ਇਹ ਆਪ ਹਣ ਪਾਏ ਪੈਸਾ ਹੀ ਉਹਨੂੰ ਭਰਪਾ ਦੋ ਜਾਂਦਾ ਹੈ ਐਸਾ ਹੀ ਬਰਪਾਪਾ ਦੋ ਜਾਂਦਾ ਹੈ ਉਹਨੂੰ ਆ ਜਾਂਦੀਆਂ ਇਹ ਬੁੜੀਆਂ ਆ ਜਾਂਦੀਆਂ ਨੇ ਕਦਿਆਂ ਜਿਆੜੇ ਵੀ ਭੋਲ ਹੈ ਇਹ ਠੀਕ ਹੋ ਜਾਂਦਾ ਕਿੰਝ ਪੈਦਾ ਪੈਦਾ ਹੋ ਜਾਂਦੇ ਨੇ ਉਗਣ ਪੈਦਾ ਹੋ ਜਾਂਦੇ ਨੇ ਜਿੱਦਾਂ ਦਾ ਤਾਂ ਤਾਂ ਤੋਂ ਸਭ ਤੋਂ ਜੰਮਦਾ ਜਿੱਦੋਂ ਕਿਛ ਗੁਜਿਆ ਉਹ ਤੋਂ ਵੀ ਕੁਝ ਟੁਕਿਆ ਹੋਇਆ ਉਹ ਤੋਂ ਕੁਝ ਨਹੀਂ ਲੁਕਿਆ ਹੋਇਆ ਕਿੰਨੇ ਜੀ ਕੋਈ ਪਰਮੇਸ਼ਰ ਤੋਂ ਕੁਝ ਵੀ ਗੁਜਿਆ ਨਹੀਂ ਕਿ ਜਿਹਨਾਂ ਗੁਰਬਾਣੀ ਦਾ ਅਵਰੋਧ ਕਰਨਾ ਹੈ ਉਹਨਾਂ ਨੂੰ ਤਰੀਕਾ ਕਰਦੇ ਹਨ ਕੋਚੇ ਦੇ ਗੋਟ ਵਾਲਾ ਕੋਚੇ ਦੇ ਨਾ ਤੋਂ ਉੱਪਰ ਹੋਣ ਵਾਲਾ ਕਾਇਮ ਲਈ ਕੋਪਟ ਹੋ ਜਾਂਦੀ ਹੁੰਦੀ ਸਕਦੀ ਜਿੱਦੋਂ ਵਰਜੀ ਕੋਈ ਜ਼ੋਰ ਲਾ ਲਵੇ ਆਪਣੇ ਦੁਨੀਆਂ ਦਾ ਦੁਗਾ ਜੁੱਲਾ ਕੇ ਕੁਰਬਾਨੀ ਦਾ ਤਸਵੀਰ ਖਾਣ ਹੈਗੀ ਐ ਇਹ ਜਿਵੇਂ ਜਿਹੜਾ ਕੋ ਇਛਦਾ ਤੇ ਆ ਫਲ ਪਾਏ ਕੋਈ ਇਹਦੇ ਵਿੱਚ ਕੁਝ ਵੀਰਾਂ ਵਿੱਚ ਇੱਛਾ ਇਛਦਾ ਤੇ ਆ ਫਲ ਖਾਏ ਕੋਈ ਲਿਖਿਆ ਸੀ ਉਹ ਠੀਕ ਨਹੀਂ ਠੋ ਬਦਾਇ ਨਾ ਜੀ ਕਿਉਂਕਿ ਐਥੇ ਹਾਂ ਪਾਇ ਦੇ ਉੱਤੇ ਐਥੇ ਪਾਇ ਸੀ ਹਾਂ ਜੀ ਆਏ ਜਾਊਗਾ ਠੀਕ ਹੈ ਜਾਨ ਦਾ ਜੋ ਗੋੜੇ ਪਰ ਤੇ ਹੋ ਰਹੀ ਹੈ ਹਾਂ ਜੀ ਜਾਨ ਗੋੜੇ ਪਰ ਹੈ ਠੀਕ ਹੈ ਜਿਹੜੀ ਗੁਰਧਾਮ ਚਾਹ ਤੇ ਹੈ ਗੁਰਬਾਣੀ ਦੇ ਪਾਠ ਪੇਡਾਂ ਦੀ ਸੂਚੀ ਇੱਕ ਪੁਸਤਕ ਲਿਖੀ ਹੈ ਉਹਦੇ ਵਿੱਚ ਇਹ ত্রুটি ਦੱਸੀ ਹੈ ਕਿ ਪਾਠ ਪੇਡ ਹੈਗਾ ਇਹ ਵੀ ਆਪਾਂ ਇਹਨੂੰ ਸਿੱਧ ਕੀਤਾ ਹੈ ਕਿ ਹਾਂ ਉਗਾ ਫਿਰ ਤੇ ਜਾ ਕੇ ਪਹੂਗਾ ਬਹੁਤ देर ਦੂਰ ਜੀ ਬੰਦਾ ਹੋਊਗਾ ਸਮੇਂ ਜੇ ਤੱਕ ਲੀਏ ਫਿਰ ਬਸ ਚੀਤਾ ਖਾਵਾ ਠੀਕ ਹੈ ਫਿਰ ਖਾਊਗਾ ਜਾ ਕੇ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੈ ਤਿਸ ਬਖਸ਼ ਲੈ ਸੁ ਸਾਹਿਬ ਮਨਪਾਣੀ ਜਿਸ ਨੂੰ ਸਾਹਿਬ ਵਡਾ ਕਰੇ ਸਾਹਿਬ ਜੀ ਨੂੰ ਵਡਾ ਤੇ ਫਿਰ ਉਹਨੂੰ ਛੋਟਾ ਕੌਣ ਕਰ ਸਕਦਾ ਉਹ ਹੋਵੇ ਉਹ ਤੇ ਉਹ ਤਾਂ ਕਿਸੇ ਸਾਹਿਬ ਵਡਾ ਕਰੇ ਹਾਂਜੀ ਕੋਈ ਵੱਡਾ ਨਹੀਂ ਉਹ ਔਰ ਜਿਹੜਾ ਕੀਤਾ ਵੱਡਾ ਨਹੀਂ ਹੋ ਸਕਦਾ ਸਾਡੀ ਦੁਨੀਆ ਕੋਟਾਂ ਬਾਦਵੇ ਬੜਾ ਬਣਾ ਲਵੇ ਵੱਡਾ ਨਹੀਂ ਹੋ ਸਕਦਾ ਸਾਹਿਬ ਤੇ ਗੁਰੂ ਗੁਰੂਆਂ ਤੋਂ ਭਗਤਾਂ ਤੋਂ ਸਾਹਿਬ ਨੇ ਵੱਡਾ ਕੀਤਾ ਵੱਡਈ ਰੰਗ ਕਿ ਦੇ ਲੋਕਾਂ ਦਾ ਵੱਡਾ ਕੀਤਾ ਇਹ ਇਹ ਤਾਂ ਮਾਰੇ ਰਹਿ ਲੋ ਕਰੀ ਬੋਕਾ ਹੀ ਲੋਕ ਨਹੀਂ ਬੋਲਦਾ ਬੁਰਾ ਔਰ ਛੋਟਾ ਬੰਦਾ ਹੁੰਦਾ ਹੈ ਵੱਡਾ ਨਹੀਂ ਬੰਦਾ ਹੁੰਦਾ ਉਹਦਾ ਜਿੱਦੜਿਆ ਸਭ ਗਿਆ ਤਦੇ ਨੂੰ ਠੀਕ ਹੈ ਇਹ ਤਾਂ ਨਾ ਨੂੰ ਨਾਰਕਨ ਗਿਆ ਉਹ ਵੱਡਾ ਹੋ ਗਿਆ ਉਹਦਾ ਜੇਦਾ ਰੱਖ ਦੋ ਤੁਮਾਨੂੰ ਲੋ ਦੁਨੀਆ ਨਹੀਂ ਲੱਗੇ ਜੇ ਵੱਡਾ ਹੋਊਗਾ ਭਾਜ ਗਣ ਦੇ ਰਿਹਾ ਜੋ ਡਾਕਾ ਮਰੇ ਠੀਕ ਹੈ ਅਸੀਂ ਉਹਨੂੰ ਉਲਟਾ ਬੋਲਣਾ ਜਿਹਨੂੰ ਸੱਚ ਕਰਨ ਵੱਡਾ ਬੋਲਦਾ ਹੈ ਠੀਕ ਹੈ ਜੀ ਸਾਹਿਬ ਵੱਡਾ ਕਰੇ ਸੋਈ ਵਡਜਾਨੀ ਜਿਸ ਸਾਹਿਬ ਭਾਵੈ ਤਿਸ ਤੇ ਜਿਸ ਜਿਹਨੂੰ ਸਾਹਿਬ ਚਾਹੁੰਦਾ ਉਹ ਬਖਸ਼ ਰਿਹਾ ਹੈ ਤੇ ਜਿਹਦੇ ਸਭਾਲੇ ਜਿਹਨੂੰ ਬੋਲਦਾ ਬਖਸ਼ ਲੈਂਦਾ ਜੇ ਕੋਈ ਬੋਲਸੇ ਤੇ ਜਾਂਦੀ ਕੋਈ ਰਿਸ਼ਤ ਨਹੀਂ ਜਾਂਦੀ ਕੋਈ ਪੈਸੇ ਨਾਲ ਨਹੀਂ ਚੱਲਦਾ ਬਖਸ਼ ਲੈਂਦਾ ਨੋ ਸਾਇਰ ਮੁਲਤਵਾਲੀ ਕੋਈ ਸਾਹਿਬ ਦੇ ਵੱਲ ਬਖਸ਼ ਲੈਂਦਾ ਕੋਈ ਜੇ ਮੈਂ ਬਖਸ਼ ਲੈਂਦਾ ਉਹਦੀ ਮਰਜੀ ਹੈ ਉਹਦੇ ਤੇ ਨਾ ਬੇਟਾ ਜੋ ਜੇ ਕੋ ਕਰੇ ਸੋ ਮੂੜ ਅਜਾਣੀ ਜਿਸ ਨੂੰ ਸਤਿਗੁਰੂ ਸੋ ਗੁਣ ਰਵੇ ਗੁਣ ਆਖ ਵਖਾਣ। ਜੇ ਸਤਿਗੁਰ ਨੇ ਦਖਿਲੇਆ ਲਿਆ ਕੋਈ ਨਹੀਂ ਕਰੇ ਜੀਸ। ਤੋ ਮੂਰਖ। ਜਿਵੇਂ ਵੀ ਵਖਰੇਆ। ਇਹ ਕੋਲ ਨਹੀਂ ਜੀ ਕਰੇ ਤੋ ਮੂਰਖ ਜਾਨੀ। ਹੋਰ ਜਾਣ ਹੋੜਾ ਮੂਰਖ ਹੋ। ਜਾਂਦਾ ਕੁਝ ਕਿਵੜੀ। ਹਾਂ ਕਾਰੀਓ ਦੀ ਨੀ ਹੈ ਬੋੜਾ ਜਾਣੀ ਜੇ ਸੇਮੋ ਮੇਲ ਮੇਲੇ ਤੋਂ ਬੋੜ ਨਵੇ ਕੋਣ ਹਾਥ ਹੋ ਖਾਲੀ ਆਸ਼ਰਤੈਦਾ ਹੋ ਕੋਈ ਜੀ ਆਏ ਜਿਉਲੀ ਉਹ ਹੈ ਜੀ ਜੇ ਸੇਮੋ ਸਾਥ ਕੋਲ ਮੇਲ ਮੇਲੇ ਤੋਂ ਬੋੜ ਨਵੇ ਫਿਰ ਨਾ ਸਾਥ ਕੋਲ ਜੀ ਵਿੱਚ ਹੁਣ ਪੈਦਾ ਹੋ ਜਾਂਦੇ ਹੋ ਜਾਂਦਾ ਹੈ ਲੁੱਟ ਪੈ ਹੋ ਜਾਂਦਾ ਹੈ ਮੈਂ ਮਰਦਾ ਹੋ ਜਾਂਦਾ ਸਭ ਨੂੰ ਇੱਕ ਕਰਕੇ ਦੇਖਦਾ ਉਹਨਾਂ ਕੋਲ ਵੈਰੀ ਗੱਲ ਤੋਂ ਨਹੀਂ ਹੁੰਦਾ ਹਾਂ ਸੁਣਨਾ ਕੋਣ ਆ ਕਮ ਖਾਣੀ ਟੈਸਟ ਹੋ ਜਾਂਦਾ ਪਾਲੂ ਹੋ ਨਾਲ ਜ਼ਿਆਦਾ ਜੋੜ ਲੂ ਬੜਾ ਕਬ ਗੋਣ ਜ਼ਰੂਰ ਏਡੀ ਹੁਣ ਹੈ ਹਾਂ ਨਾਨਕ ਸੱਚਾ ਸੱਚ ਹੈ ਬੁਜ ਸੱਚ ਸਮਾਨ ਹਰ ਇੱਕਾ ਸੱਚਾ ਸੱਚ ਹੈ ਜਿਹੜਾ ਸੱਚਾ ਜਣਾ ਉਹ ਹੀ ਸੱਚ ਹੈ ਉਹ ਜਿਹੜਾ ਸੱਚ ਸੁਬੜੀ ਉਹਨੂੰ ਬੁਝ ਕੇ ਸੱਚਿਤ ਸੁਬੜਾ ਗਿਆ ਹੂੰ ਹੂੰ ਰੀਸ ਕਰਦਾ ਉਹ ਸਮਾ ਕੇ ਦਿਖਾ ਰੀਸ ਕਰਕੇ ਗਿਆ ਨਾਨਕ ਸੱਚਾ ਜਿਹੜਾ ਮੰਚਿਤ ਕਰਕੇ ਸੱਚਾਰਾ ਜੀ ਹੂੰ ਜਿਹੜਾ ਸੱਚਾਰਾ ਹੋ ਗਿਆ ਸੱਚਾਰਾ ਅੱਧਾ ਹੈ ਅੱਛਾ ਸੱਚਾਰਾ ਅੱਧਾ ਹੈ ਸੱਚਾਰਾ ਨਾ ਬੋਲਿਓ ਉਹ ਜਦੋਂ ਸੱਚਾਰਾ ਹੋ ਗਿਆ ਹੂੰ ਉਹ ਿਆਰਾ ਹੋ ਗਿਆ ਅੱਛਾ ਸਾਡੇ ਤੇ ਹੈ ਹੂੰ ਠੀਕ ਹੈ ਹਾਂਜੀ ਹਾਂਜੀ ਖਾਰੇ ਟਖਾਰੇ ਨੂੰ ਤਾਂ ਤਸਨਾ ਲੱਗਿਆ ਆਇਆ ਜੋ ਉਹ ਤਾਂ ਦੇਹ ਧਾਰੀ ਹੈ ਫਿਰ ਜਿਆਣਾ ਤਾਂ ਦੇਹ ਧਾਰੀ ਹੈ ਤਸਨਾ ਲੱਗਿਆ ਰੁਕ ਰੁਕ ਧਾਰੀ ਹੈ ਦਾ ਹੂੰ